ਤੇ ਸਾਜੀ ਤੁਸੀਂ ਉਹ ਕਿਰਪਾ ਤੇ ਉਦੋਂ ਬਾਅਦ ਰਿਕਾਰਡਿੰਗ ਵੀ ਕਰ ਲਈਏ ਇਹ ਠੀਕ ਹੈ ਹਾਂਜੀ ਨਹੀਂ ਮੈਂ ਕਰਨਾ ਕੋਸ਼ਿਸ਼ ਬਸ ਨਾ ਪਤਾ ਨਹੀਂ ਕੋਈ ਸਾਧਗਰਾਂ ਦੀ ਰਜ਼ਾ ਹੈ ਤੇ ਤਕਰੀਬਨ ਸਫੇ ਹੋਰ ਜਿਹੜੀਆਂ ਗੱਲਾਂ ਹੋਰ ਯਾਦ ਆਉਂਦੀਆਂ ਨੇ ਇਹਦੇ ਤਕਰੀਬਨ ਗੁਰੂ ਨੂੰ ਮਤਲਬ ਮੰਨਣ ਦੀ ਗੱਲ ਕਰਦਾ ਇਕਪੂਰ ਥਲੇ ਰਹਿੰਦੇ ਸਨ ਉਹਨਾਂ ਤੇ ਗੁਜ਼ਰ ਗਿਆ ਨੇ ਕਾਫੀ ਜ਼ੇਰ ਹੋ ਗਿਆ ਆਪਣੇ ਕੋਲ ਨੇ ਆਦ ਦਾ ਵੀ ਦਸੰਦਾ ਵੇ ਹਾਂਜੀ ਇੱਥੇ ਆਉ ਤੇ ਨਾਜਰ ਸਿੰਘ ਨਾਲ ਕੋਲ ਪਿਆ ਗੱਲ ਸੁਣੋ ਮਤਲਬ ਜੀ ਸੱਚੇ ਪਾਸ਼ਾ ਆਗਿਆ ਜੀ ਮਿਲ ਚੁੱਕੀ ਆ ਸਿਰਫ ਉਹਨੂੰ ਇਹ ਵੀ ਇੱਕ ਵਾਰੀ ਫੇਰ ਪੜ ਕੇ ਕਿਉਂਕਿ ਉਹਨਾਂ ਨੇ ਹੋਰ ਬੜੀਆਂ ਗੱਲਾਂ ਕੀਤੀਆਂ ਇਹਨੇ ਨਾਲ ਨੋਟ ਦਿੱਤੇ ਨੇ ਕਈ ਥਾਂ ਇਹ ਉਹਨੇ ਜਿਹੜੇ ਆਪਣੇ ਵਿਚਾਰ ਦਿੱਤੇ ਨੇ ਨਾ ਉਹ ਨਿਸ਼ੰਘ ਹੋ ਕੇ ਦਿੱਤੇ ਨੇ ਉਹ ਸਾਨੂੰ ਲੋੜ ਨਹੀਂ ਕਿਉਂਕਿ ਜਿਹਦੇ ਨਾਲ ਮਤਲਬ ਅਖੀਅਤਤਾ ਪੈਂਦੀ ਹੈ ਨਾ ਉਹ ਕੱਟਣੇ ਨੇ ਸਿਰਫ ਉਹਨੂੰ ਇੱਕ ਦੋ ਵਾਰੀ ਮਤਲਬ ਸਿਆਣੇ ਸੱਜਣ ਜਿਹੜੇ ਇਹਨੂੰ ਜਾਣਦੇ ਨੇ ਕੋਈ ਦੋ ਚਾਰ ਬਹਿ ਕੇ ਉਹਨੂੰ ਪੜ ਲੈਣਾ ਇੱਕ ਵਾਰੀ ਹੁਕਮ ਹੋਇਆ ਸੀ ਵੀ ਆਦ ਤੇ ਪੜਿਆ ਸੀ ਤਕਰੀਬਨ ਸਾਰਾ ਤੇ ਨਹੀਂ ਇੰਨਾ ਪੜਿਆ ਪਹਿਲੋਂ ਗੁਰੂ ਜੀ ਨੇ ਆਪ ਬਹਿ ਕੇ ਨਾ ਉੱਥੇ ਬੱਤਰ ਵਿੱਚ ਅਸੀਂ ਮਨਾਲੀ ਗਏ ਸੀ ਉੱਥੇ ਕਾਫੀ ਚਿਰ ਪੜਦੇ ਰਹੇ ਨੇ ਦਸਮ ਦਾ ਵੀ ਕੁਝ ਕੀਤਾ ਹੈ ਬਾਕੀ ਤਾਂ ਮੈਂ ਹੀ ਉਹਨੂੰ ਪੜਿਆ ਸੀ ਇੱਕ ਦੋ ਹੋਰ ਸਾ ਨਾਲ ਉਹਦੇ ਇਸ ਤਰ੍ਹਾਂ ਪੜਿਆ ਸੀ ਕਿ ਕੰਮ ਤੇ ਜਿਹੜੇ ਨਾ ਬਹੁਤ ਮਤਲਬ ਗੁਰਬਾਣੀ ਵੱਲ ਉਂਝ ਭਾਵੇਂ ਸਾਨੂੰ ਲੋਕੀਏ ਸਮਝਦੇ ਨੇ ਵੀ ਇੰਨਾ ਸ਼ੁੱਧ ਗੁਟਕਾ ਸਾਡਾ ਭਾਲ ਕੇ ਲੱਭ ਦੇਣ ਲੋਕੀ ਪਰ ਜਿੰਨਾ ਹੋਣਾ ਚਾਹੀਦਾ ਨਾ ਉਹਨਾਂ ਦੇ ਮਤਲਬ ਆ ਜਿਵੇਂ ਜਿਵੇਂ ਸੋਝੀ ਆਉਂਦੀ ਹੈ ਨਾ ਮੈਂ ਤਾਂ ਦੱਸਣਾ ਪਹਿਲਾਂ ਪਹਿਲੋਂ ਮੇਰੇ ਦਾਦਾ ਜੀ ਪਾਠ ਕਰਦੇ ਹੁੰਦੇ ਫਿਰ ਉਹਦਾ ਤੋਂ ਵੀ ਛੱਡੀ ਨਾ ਉਹ ਗੁਜ਼ਰ ਗਿਆ ਸੰਤ ਉਸ ਤੋਂ ਬਾਅਦ ਫਿਰ ਮੈਂ ਵੀ ਉਹ ਥੋੜਾ ਜਿਹਾ ਚਿਰਨਾ ਪਾਠ ਪੂਠੀ ਕਰਨ ਲੱਗਾ ਤੇ ਖੁੱਲਿਆਂ ਵਿੱਚ ਹੀ ਜਾਂਦਾ ਆਂ ਖੁੱਲਿਆਂ ਹੀ ਤਾਂ ਫਿਰ ਇਹਨਾਂ ਸਾਗਰਾਂ ਕਿਰਪਾ ਕੀਤੀ ਜਦੋਂ ਮੈਂ ਸਕੂਲੇ ਗਿਆ 60 ਚੋਂ ਬਾਅਦ ਨਾ ਇੱਕ ਦਿਨ ਉਹ ਗੱਲ ਚੱਲ ਪਈਏ ਤੇ ਸੁਪਨੇ ਜਿਨਾਂ ਦਰਸ਼ਨ ਦਿੱਤੇ ਉਦੋਂ ਹਲੀ ਇਹਨਾਂ ਨੇੜ ਨੁੰਨੇ ਸੀ ਤੇ ਆਂਦੇ ਨੇ ਵੀ ਉੱਥੇ ਨਾ ਤੂੰ ਦੂਸਰਾ ਖੁੱਲਿਆਂ ਦੇ ਪਾਠਾਂ ਦੇ ਨਾ ਜਾਇਆ ਕਰ ਹੰਡ ਪਾਟਰਾ ਦੂਜੇ ਮੈਂ ਉਸੇ ਤਰ੍ਹਾਂ ਜਿਸ ਤਰ੍ਹਾਂ ਆਮ ਆਪਾਂ ਬੈਠੇ ਇਸ ਤਰ੍ਹਾਂ ਹੀ ਇਹ ਤੇ ਪਤਾ ਨਹੀਂ ਹੁੰਦਾ ਉਦੋਂ ਵੀ ਸੁਪਨਾ ਆਉਂਦਾ ਵਿਆ ਮੈਂ ਹੈ ਜੀ ਤਿੰਨ ਚਾਰ ਜੀਆਂ ਖਾਣ ਵਾਲੇ ਤੇ 70 ਰੁਪਏ ਮਿਲਦੇ ਨੇ ਇਹ ਤਕਰੀਬਨ 62 ਦੀ ਗੱਲ ਹੋਣੀ 61 ਦੀ ਫਿਰ 60 ਦੀ ਤੇ ਗੱਲ ਪਤਲਾ ਕੰਮ ਕਿਸ ਤਰ੍ਹਾਂ ਚੱਲੇ ਆ ਸੁਪਨੇ ਚ ਆਉਂਦੇ ਨੇ ਅਖੇ ਨਹੀਂ ਕੋਈ ਡਰ ਨਹੀਂ ਤੇ ਤੂੰ ਜਾਇਆ ਨਾ ਕਰ ਤੇ ਸਾਗੁਰਾ ਆਪੇ ਕਿਰਪਾ ਕਰੇ ਉਹ ਦਿਨ ਤੇ ਅੱਜ ਦਾਣਾ ਅੱਜ ਮੈਂ ਸਮਝਣਾ ਵੀ ਕਈਆਂ ਨਾਲ ਮੈਂ ਚੰਗਾ ਮਾਏਕ ਪੱਖੋਂ ਵੀ ਪਰਮਾਇਕ ਪੱਖੋਂ ਨਾਲੋਂ ਜਿਹੜਾ ਜ ਮੈਨੂੰ ਮਿਲਿਆ ਨਾ ਜਿਉ ਕੁਛੇ ਤੇ ਆਪਣੇ ਮਨ ਦੀ ਹਾਲਤ ਤੇ ਮਾਣ ਨਾ ਕਰੇ ਵੀ ਸਤਿਗੁਰੂ ਕਿਰਪਾ ਕਰੇ ਹੁਣ ਜਿੰਨਾ ਮਨ ਕਰਕੇ ਇਹਨਾਂ ਵੀ ਇਸ ਪਾਸੇ ਭੱਜ ਦੌੜ ਮਾਇਆ ਨੂੰ ਉਹ ਮੇਰੇ ਤੇ ਕਿਰਪਾ ਕਰਦੀ ਹੈ ਜਦੋਂ ਅਲੀ ਦਸਵੀਂ ਦਾ ਰਿਜ਼ਲਟ ਨਹੀਂ ਸੀ ਆਇਆ ਤੇ ਮੈਂ ਮੀਠ ਲੱਗਾ ਸਾਂ ਨਹਿਰਾਂ ਤੇ ਹੁੰਦੇ ਨੇ ਬੇਲਦਾਰਾਂ ਦੇ ਉੱਤੇ ਉੱਥੋਂ ਵੀ ਮਤਲਬ 2-3 ਮਹੀਨੇ ਹਾਲੀ ਉਦੋਂ 60 ਰੁਪਏ ਤਨਖਾਹ ਸੀ ਅੱਜ ਤੇ ਜੇ ਮੈਂ ਹੁੰਦਾ ਤੇ ਰਿਟਾਇਰ ਹੋ ਕੇ ਪੈਨਸ਼ਨ ਮਿਲਦੀ ਤੇ ਉਹ ਉੱਥੇ ਮੈਂ ਐਵੇਂ 2 2.5 ਮਹੀਨੇ ਕੀਤੇ ਤੇ ਉਹ ਮੈਨੂੰ ਕਹਿਣ ਵੀ ਤੂੰ ਜੇ ਨਹੀਂ ਤੇ ਤੂੰ ਦੂਜਾ ਛੁੱਟੀ ਲੈ ਲੈ ਵਿਦ ਪੇ ਤੈਨੂੰ ਦੇ ਦਿੰਨੇ ਆ ਤੇ 2 ਮਹੀਨਿਆਂ ਨੂੰ ਤੈਨੂੰ ਉਹਦੇ ਉੱਤੇ ਨਾ ਪੰਸਾਲਨ ਵੀ ਮਿਸਤਰੀ ਵੀ ਉਹਨਾਂ ਦੇ ਨੇ ਉਹਦੀ 80 ਰੁਪਏ ਦਾ ਨਾ ਆਉਂਦੀ ਮੈਂ ਕਿਹਾ ਨਹੀਂ ਉਹ ਮੈਂ ਅੱਜ ਸੋਚਣਾ ਵੀ ਜੇ ਮੈਂ ਉੱਥੇ ਲੱਗਾ ਰਹਿੰਦਾ ਨਾ ਸ਼ਾਇਦ ਬੱਚੇ ਮੇਰੇ ਉੱਥੇ ਸ਼ਹਿਰ ਵਿੱਚ ਰਹਿੰਦੇ ਕੁਝ ਚੰਗੇ ਹੋ ਜਾਂਦੇ ਜਾਂ ਕੁਝ ਹੋਦੇ ਪਰ ਜਿਹੜੀ ਮੈਨੂੰ ਅੱਜ ਚੀਜ਼ ਮਿਲੀ ਹੈ ਨਾ ਉਹ ਮਤਲਬ ਮਨ ਕਰਕੇ ਜਿਹੜੀ ਮਿਲੀ ਹੈ ਨਾ ਉਹ ਨਹੀਂ ਸੀ ਮਿਲਣੀ ਉਥੇ ਮੈਂ ਜਿਹੜੀ ਤੁਹਾਨੂੰ ਗੱਲ ਦੱਸਣ ਸੋਝੀ ਦੀ ਗੱਲ ਜਿੰਨੀ ਜਿੰਨੀ ਕਿਸੇ ਨੂੰ ਗੁਰੂ ਦਿੰਦਾ ਉਥੇ ਉਹਨਾਂ ਨੇ ਅਕਾਲੀਆਂ ਦੇ ਜਾਂਦਾ ਹੁੰਦਾ ਤੇ ਉਹਨਾਂ ਨੇ ਇੱਕ ਸੰਪਟ ਪਾਠ ਉਹਨਾਂ ਚ ਕਰਦੇ ਨੇ ਸਾਡੇ ਜ ਨਹੀਂ ਉਹ ਮਤਲਬ ਕੋਈ ਜਿੱਥੇ ਗੁਰੂ ਨਾਨਕ ਕਿਸੇ ਦਾ ਹੁੰਦਾ ਨਾ ਨਾਨਕ ਦਾ ਨਾਮ ਜਾਂ ਭਗਤ ਦਾ ਹੁੰਦਾ ਜਿਹਦੀ ਕਿਰਤੇ ਉਥੇ ਉਹ ਕੋਈ ਸ਼ਬਦ ਰੱਖ ਲੈਂਦੇ ਨੇ ਜੀ ਹੋ ਉਹਦੀ ਘਰ ਦੀ ਭਾਵਨਾ ਹੁੰਦੀ ਹੈ ਉਹ ਸ਼ਬਦ ਰੱਖ ਕੇ ਤੇ ਉਥੇ ਪੜ੍ਹ ਕੇ ਤੇ ਉਦੋਂ ਬਾਅਦ ਫੇਰ ਕਿਹਦਾ ਚੱਲਦਾ ਉਹ ਅਖੰਡ ਪਾਠ ਵਾਂਗੂ ਤੇ ਉਹ तकरीबन ਜਿੱਥੇ ਆਪਾਂ 48 ਘੰਟਿਆਂ ਚ ਭੋਗ ਪਾਨੇ ਜਾਂ 40 ਚ ਪਾਨੇ ਉਹ 7 ਦਿਨ ਲੱਗਦੇ ਨੇ तकरीबन ਉਸੇ ਤਰ੍ਹਾਂ ਲਗਾਤਾਰ ਚੱਲਦਾ ਨਾ ਹਾਂਜੀ ਜਿੱਥੇ ਉਹ ਆ 57 ਸ਼ਲੋਕ ਨੇ 57 ਵਾਰੀ ਤੇ ਤੁਹਾਨੂੰ ਉੱਥੇ ਉਹ ਸੰਪਟ ਦੇਣਾ ਪਏਗਾ ਜਿਹੜੇ ਆਪਾਂ ਸ਼ਲੋਕ ਪੜ੍ਹਨੇ ਆ ਉਹ ਜਿੱਥੇ ਨਾਨਕ ਦਾ ਨਾਮ ਆ ਗਿਆ ਜਾਂ ਕਬੀਰ ਦਾ ਆ ਗਿਆ ਜਾਂ ਜਿੱਥੇ ਉਹ ਸ਼ਬਦ ਖਤਮ ਹੋਣਾ ਹੈ ਅੱਛਾ ਉੱਥੇ ਉਹਨਾਂ ਨੇ ਉਹ ਸੰਪਟ ਪੜ੍ਹਨਾ ਇੱਕ ਸ਼ਬਦ ਰੱਖਿਆ ਹੋਵੇ ਦੋ ਰੱਖਿਆ ਹੋਵੇ ਕੋਈ ਵੀ ਰੱਖੇ ਹੋਣ ਇਸ ਤਰ੍ਹਾਂ ਉਹਨਾਂ ਨੇ ਕਰਾਇਆ ਤੇ ਉੱਥੇ ਇੱਕ ਸਾਧੂ ਸੀ ਜਿਹੜਾ ਉਹਨਾਂ ਦਾ ਮਤਲਬ ਨਾ ਬਾਹਰੋਂ ਆਇਆ ਸੀ ਉਹਦੇ ਅੰਡਰ ਸਾਰਾ ਕੁਝ ਨਾ ਉਹਦੀ ਲੀਡਰਸ਼ਿਪ ਵਿੱਚ ਹੋਣਾ ਸੀ ਤੇ ਕਰਾਂਦੇ ਉਹ ਵੀ ਬਹੁਤ ਵਧੀਆ ਸਨ ਉਹਨੂੰ ਧੂਪੀਏ ਤੇ ਨਹੀਂ ਬਿਠਾਉਂਦੇ ਤੇ ਉਸ ਤਰ੍ਹਾਂ ਉਹ ਮਤਲਬ ਇਸ਼ਨਾਨ ਪਾਣੀ ਉਹਨਾਂ ਕਰਾ ਕੇ ਉਹਨਾਂ ਆਪਣੇ ਕੱਪੜੇ ਰੱਖੇ ਉਹ ਪਾਠੀ ਨੂੰ ਪਵਾਣੇ ਦੇ ਦਸਰਾ ਜਿਸ ਉਹ ਪੰਜ ਚਾਰ ਰੋਲਾਂ ਬਲੱਗੀਆਂ ਨਾ ਸਾਰਿਆਂ ਨੇ ਇੱਕ ਇੱਕ ਵਾਰੀ ਪਹੁੰਚਿਆ ਉਹਨੂੰ ਪੁੱਛਦੇ ਨੇ ਵੀ ਦੱਸ ਦੋ ਇਹਨਾਂ ਦਾ ਕੀ ਹਾਲੇ ਪਾਠੀਆਂ ਦਾ ਪਾਠੀ ਉਹਨਾਂ ਨੇ ਸਾਰੇ ਸਰਸੇ ਸ਼ਹਿਰ ਦੇ ਨਾਲ ਜਿਹੜੇ ਚੰਗੇ ਸਨ ਉਹ ਸਨ ਉਹ ਜਿਸ ਲਾਏ ਨਾ ਤੇ ਇੱਕ ਮੇਰੇ ਨਾਲ ਦਾਦੇ ਮੇਰੇ ਨਾਲ ਬਾਠ ਕਰਦੇ ਬਜ਼ੁਰਗ ਸਣ ਕਮੋਦ ਸਿੰਘ ਉਹ ਨਾਮਤਾਰੀਏ ਸਨ ਤੇ ਜਾਂ ਮੈਂ ਆ ਸਾਂ ਨਾਮਤਾਰੀਆ ਦੁੱਧੇ ਉਤੇ ਸਨ ਉਹ ਆਂਦੇ ਨੇ ਆ ਜਿਹੜਾ ਬਿਰਦੇ ਨਾ ਇਹ ਕੁਛ ਕੁਛ ਪਾਠੀ ਹੈਗਾ ਬਾਕੀ ਤੁਸੀਂ ਗੰਦਫੂਸ ਹੀ ਇਕੱਠਾ ਕੀਤਾ ਇਹ ਉਹਦੇ ਸ਼ਬਦ ਸਨ ਹਾਂਜੀ ਅੱਛਾ ਮੈਂ ਵੀ ਆਪਣੇ ਆਪ ਨੂੰ ਸਮਝਾਂ ਭਾਵੇਂ ਹਾਲੀ ਥੋੜਾ ਹੀ ਸਾਂ ਉਦੋਂ ਮੇਰੀ ਉਮਰ ਤਕਰੀਬਨ ਕੋਈ 18 ਕੁ ਸਾਲਾਂ ਦੀ ਕਰ ਹੋਵੇਗੀ 18 19 ਸਾਲ ਮੈਂ ਵੀ ਆਪਣੇ ਆਪ ਨੂੰ ਸਮਝਾਂ ਵੀ ਮੈਂ ਵੀ ਠੀਕ ਹਾਂ ਦੂਜੇ ਵੀ ਸਮਝਣ ਪਰ ਉਹਦੀ ਗੱਲ ਦਾ ਅੱਜ ਪਤਾ ਲੱਗਦਾ ਹਾਲੀ ਵੀ ਜੋ ਕੁਝ ਕਰਨਾ ਹੈ ਨਾ ਮੈਨੂੰ ਪਤਾ ਵੀ ਤੁਸੀਂ ਤੁਮ ਮੇਰਾ ਆਦਰ ਮਾਨ ਕਰਦੇ ਹੋ ਸਤਿਗੁਰੂ ਜੀ ਮਾਨ ਕਰਦੇ ਨੇ ਪਰ ਮੈਨੂੰ ਪਤਾ ਜਦੋਂ ਪੜ੍ਹਦੇ ਆ ਪੜ੍ਹਦੇ ਨਾ ਐਨੀਆਂ ਮਤਲਬ ਬਾਣੀ ਦੇ ਅਥਾ ਹੈ ਜੀ ਇਹਦਾ ਮਤਲਬ ਤੇ ਇਹ ਤਾਂ ਬੜਾ ਕੁਸ਼ੇ ਸਮੁੰਦਰ ਇਹਦੇ ਤੇ ਤੇ ਅੱਜ ਮੈਨੂੰ ਪਤਾ ਲੱਗਦਾ ਵੀ ਉਹਦੀ ਗੱਲ ਜਿਹੜੀ ਸੀ ਉਹ ਬਿਲਕੁਲ ਠੀਕ ਸੀ ਦੇ ਹੋਰ ਉਹ ਗੱਲ ਕੌੜੀ ਲੱਗਦੀ ਬਹੁਤ ਕੌੜੀ ਲੱਗਦੀ ਹੈ ਕੌੜੀ ਲੱਗਦੀ ਹੈ ਜੀ ਜਦੋਂ ਨਹੀਂ ਤੇ ਕੌੜੀ ਲੱਗਦੀ ਉਦੋਂ ਜਦੋਂ ਅਗਿਆਨੀ ਆ ਠੀਕ ਹੈ ਅਗਿਆਨਤਾ ਇਹ ਰੌਲਾ ਹੈ ਤੇ ਅੱਜ ਵੀ ਅੱਜ ਦੁਜੇ ਲੋਕੀ ਆ ਆਮ ਵਿਦਵਾਨਾਂ ਦਾ ਇਕੱਠ ਨੇ ਵਿਦਵਾਨ ਹੋਣਾ ਚਾਹਗਾ ਪਰ ਵਿਦਵਾਨ ਸਮਝਣਾ ਜਿਹੜਾ ਨਾ ਆਪਣੇ ਆਪ ਨੂੰ ਉਹ ਮਾੜਾ ਜਦੋਂ ਮੈਂ ਇਹ ਸਮਝਣਾ ਮੰਗਾ ਨਾ ਵੀ ਮੈਂ ਹਾਂ ਬਸ ਅੱਗੋਂ ਸਿੱਖਣਾ ਤੁਹਾਡਾ ਖਤਮ ਖਤਮ ਹੋ ਜਾਏਗਾ ਇਹਨਾਂ ਜਦੋਂ ਸਾਧਗੁਰੂ ਜੀ ਕਿਰਪਾ ਕਰਦਾ ਜਿਹੜੀ ਫੀਡਬੈਕ ਹੁੰਦੀ ਹੈ ਨਾ ਫੀਡਬੈਕ ਅਸੀਂ ਉਹ ਚੀਜ਼ ਕਹਿੰਦੇ ਹਾਂ ਵੀ ਜਿੱਦਾਂ ਤੁਸੀਂ ਕੋਈ ਗੱਲ ਕਰਦੇ ਆ ਨਾ ਜੇ ਤੁਸੀਂ ਮੈਨੂੰ ਗੱਲ ਕਰੋਗੇ ਤਾਂ ਮੈਂ ਬੜਾ ਫਿਰ ਪਰ ਉਹ ਮੈਂ 2000 ਹੋ ਜਾਂਦੀ ਹੈ ਹਨਾ ਆਪਣੇ ਤੇ ਜੇ ਕਹੂੰਗਾ ਮੈਂ ਐਵੇਂ ਬੋਲੀ ਤੇ ਇਦਾਂ ਆ ਵੀ ਉਹ ਫਿਰ ਉੱਥੇ ਕੰਮ ਆਉਂਦਾ ਹਾਂ ਫਿਰ ਉੱਥੇ ਦੌੜਤੀ ਸੱਚ ਪਾਤਸ਼ਾਹ ਕਿਰਪਾ ਦੇ ਨਾਲ ਜਿੰਨੇ ਰਾਗੀ ਛੋਟੀ ਪਨੀਰੀ ਹੁਣ ਤੇ ਸੱਚ ਬਾਹਰ ਨੇ ਕੀਤੀ ਇਹਨਾਂ ਦੀ ਦੇਖਦੇ ਬਿਲਕੁਲ ਹਾਂਜੀ ਅਜੇ ਉਹਦਾ ਆਇਆ ਨਾ ਉਦੋਂ ਦਾ ਕਾਫੀ ਸਦਾਰ ਸਤਗੁਰੂ ਜੀ ਨੇ ਕੀਤਾ ਵੀ ਛੋਟੀਆਂ ਛਟੀਆਂ ਗੱਲਾਂ ਦੇ ਹਾਂਜੀ ਇਸ ਤਰ੍ਹਾਂ ਮਤਲਬ ਨੱਕੇ ਚੋਂ ਲੰਘਾਣ ਵਾਲੀ ਗੱਲ ਪਰ ਪਹਿਲੋਂ ਬਈ ਉਹ ਨੂੰ ਤਾਂ ਗੁੱਸਾ ਕਰਦੇ ਸਨ ਹੁਣ ਵੀ ਕਈ ਵਾਰੀ ਗੱਲ ਹੋਈ ਏ ਤੇ ਗੁੱਸਾ ਕਰ ਬਿੰਦੇ ਨੇ ਪਰ ਹੁਣ ਉਹ ਸਮਝ ਗਏ ਨੇ ਅੱਗੇ ਬਹੁਤਾ ਗੁੱਸਾ ਕਰਦੇ ਸਨ ਕੋਈ ਹੁਣ ਜਿਹੜੇ ਨਵੇਂ ਪੋਚ ਚੱਲੇ ਨੇ ਉਹਨਾਂ ਨੂੰ ਤਾਂ ਕੁਝ ਥੋੜਾ ਜਿਹਾ ਨਾ ਘੱਟ ਹੁੰਦੀ ਏ ਪਹਿਲਾਂ ਤਾਂ ਸਹੀ ਗੱਲ ਉਹਦਣ ਚੱਲ ਪਿਆ ਕੰਮ ਉਸ ਦੂਸਰਾ ਆਪਣਾ ਇੱਕ ਸ਼ਬਦ ਉਹ ਕਾਬਜ਼ ਲੱਗਾ ਮਸਤਕ ਚਰਨ ਰਾਜ ਉਹਦਾ ਕਬਤੇ ਉਹਦਾ ਭਾਈ ਗੁਰਦਾਸ ਜੀ ਦਾ ਉਹਦੀ ਦੂਜੀ ਲਾਈਨ ਦਾ ਆਖੀਰਲਾ ਸ਼ਬਦ ਸੀ ਬਸੇਖੋ ਬੱਬੇ ਨੂੰ ਸਿਹਾਰੀ ਸਸੇ ਨੂੰ ਲਾਂ ਖਖਾ ਊੜੇ ਨੋਕਰ ਉਹਨਾਂ ਕੋਲੇ ਨੇ ਪੜਿਆ ਬਸੇ ਬਸੇਖੋ ਬੱਬਾ ਮੁਖਤਾ ਬੋਲਿਆ ਸਤਗੁਰੂ ਜੀ ਨੇ ਮੇਰੇ ਅਲ ਵੇਖਿਆ ਉਹ ਇੰਨੀ ਕੋਈ ਕਿਰਪਾ ਹੋਣ ਮਤਲਬ ਨਾ ਜਿੱਥੇ ਰਹੀਏ ਨਾ ਤੇ ਉਹਨਾਂ ਦੀ ਕਿਰਪਾ ਦੀ ਗੱਲ ਝੜਪੜ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਮਤਲਬ ਨਾ ਹੋਂ ਆ ਗੱਲ ਇੱਥੇ ਵੇ ਉਹ ਉਸੇਲੇ ਉਹਨਾਂ ਵੇਖ ਲਿਆ ਮੇਰੇ ਅਲ ਤੇ ਬੋਲਣਾ ਨਹੀਂ ਸੀ ਐਸੀ ਨਿਤਨੇਮ ਤੋਂ ਬਾਅਦ ਹੀ ਹੋਣੀ ਆਪਾਂ ਦਾ ਹਾਲੀ ਹਫਤਾ ਦੀ ਗੱਲ ਹੈ ਉਹ ਇਸ ਲਈ ਨਾ ਤੇ ਮੇਰੇ ਨਾਲ ਵੇਖਿਆ ਮੈਂ ਕਿਹਾ ਜੀ ਮੇਰੇ ਦਿਮਾਗ ਇਤੇ ਆਉਂਦਾ ਬੱਬੇ ਨੂੰ ਸਿਆਰੀ ਬਸੇਖੋ ਇਸ ਤਰ੍ਹਾਂ ਪਾੜ ਉਹਨਾਂ ਮੇਰੇ ਕਹਿਣ ਦੇਣਾ ਉਹਨੂੰ ਰੋਕ ਦਿੱਤਾ ਆਪ ਤੇ ਬੋਲਣ ਆਂਦੇ ਨੇ ਉਹਨੂੰ ਦੱਸ ਮੈਂ ਕਿਹਾ ਜੀ ਪਾੜ ਜਿਹੜਾ ਨਾ ਬੱਬੇ ਨੂੰ ਸਿਆਰੀ ਨਹੀਂ ਤੁਸੀਂ ਬੁਲਾਉਂਦੇ ਬਸੇਖੋ ਉਹ ਆਂਦਾ ਨਹੀਂ ਜੀ ਪਾੜ ਜਿਹੜਾ ਨਾ ਉਹਦੇ ਬਸੇਖੋ ਹੀ ਬੱਬਾ ਮੁਕਤਾ ਹੈ ਮੈਂ ਠੀਕ ਬੋਲਣਾ ਪਿਆ ਆਂਦੀ ਤੇ ਬਾਕੀ ਇਸ ਤਰ੍ਹਾਂ ਤੁਸੀਂ ਜਾਂਦੇ ਮੈਂ ਉਸ ਤਰ੍ਹਾਂ ਬੁਲਾ ਦੇਣਾ ਮੇਰੇ ਲਾਣੇ ਕਰਕੇ ਸ਼ਰਮ ਹੈ ਜੀ ਹੁਣ ਮੈਂ ਕਰਾਂਗੀ ਮੇਰੇ ਕੋਲ ਸਬੂਤ ਕੋਈ ਨਹੀਂ ਕੋਈ ਥੋੜਾ ਜਿਹਾ ਮੇਰਾ ਰੌਲਾ ਵੀ ਮੈਂ ਤੇ ਇਹਨਾਂ ਵਤਨ ਨੂੰ ਸਬੂਤ ਹੋਵੇ ਨਾ ਫਿਰ ਤੇ ਬੰਦਾ ਆਖੜ ਕੇ ਗੱਲ ਕਰ ਸਕਦਾ ਹਾਂਜੀ ਮੈਂ ਖਾ ਉਹ ਅੱਛਾ ਉਹਦਾ ਇਹ ਸੀ ਵੀ ਮੇਰੇ ਕੋਲ ਤੁਕ ਤਤ ਸੀ ਨਾ ਜੀ ਤੁਕ ਤਤ ਕਰਾਉਂਦਾ ਦੋਸਤ ਮੈਂ ਘਰੋਂ ਲਿਆ ਕੇ ਤੇ ਆਖ ਦਿਨਾਂ ਹੁਣ 4-500 ਕਬਿੱਤੇ ਕਦੋਂ ਆਦਮੀ ਲੱਭੇ ਹਾਲੀ ਇਹਦੇ ਵਿੱਚ ਜਿਹੜਾ ਨਾ ਆਦ ਵਿੱਚ ਉਹਦਾ ਪਤਾ ਲੱਗ ਜਾਂਦਾ ਵੀ ਤਕਰੀਬਨ ਅੰਦਾਜ਼ਾ ਲਾ ਲਈਦਾ ਵੀ ਐਸਰਾ ਆ ਕੇ ਤੇ ਇੱਥੇ ਕੋਈ ਉਹਦਾ ਹੁਣ ਮਤਲਬ ਇੰਨਾ ਅਭਿਆਸ ਹੀ ਨਾ ਹੋਇਆ ਉਹ ਚਲੋ ਜੀ ਮੈਂ ਆਖਿਆ ਦੀ ਫੇਰ ਗੱਲ ਕਰਾਂਗਾ ਮੈਂ ਪੰਡਿਤ ਜੀ ਵੀ ਆਖਣ ਵੀ ਬੱਬਾ ਮੁਕਤਾ ਹੈ ਉਹ ਕੋਸ਼ ਕੱਢ ਬੈਠੇ ਆਖਦੇ ਆ ਵੇਖੋ ਜੀ ਆ ਨਹੀਂ ਜੀ ਵਿੱਚੇ ਦੁਆਾਂ ਰਾਗੀ ਪੜਦੇ ਸਨ ਉਹ ਵੀ ਸਾਧਗੁਰੂਆਂ ਨੂੰ ਆਂਦੇ ਨਹੀਂ ਜੀ ਬੱਬਾ ਮੁਕਤਾ ਹੈ ਮੈਂ ਚਲੋ ਜੀ ਠੀਕ ਹੈ ਉਹ ਫਿਰ ਸ਼ਾਮ ਨੂੰ ਮੈਂ ਆਣ ਕੇ ਲਾ ਡੇਢ ਘੰਟਾ ਲਾਇਆ ਫੇਰ ਉਹ ਲੱਬਿਆ ਦੂਤ 부ਜੀ ਵਾਰੀ ਜਦੋਂ ਰਿਪੀਟ ਕੀਤਾ ਫੇਰ ਮੈਂ ਸਾਧਗੁਰੂ ਜੀ ਨੂੰ ਅਰਜ਼ੀ ਕੀਤੀ ਮੈਂ ਆਖਿਆ ਜੀ ਬੱਬੇ ਨੂੰ ਸਿਹਾਰੀ ਹੈ ਉਹ ਜੋ ਕੁਝ ਕਹਿਣ ਨਹੀਂ ਜੀ ਮੇਰਾ ਤੇ ਹੁਣ ਚੇਤਾ ਜਿਹੜਾ ਨਾ ਉਹ ਭੁੱਲ ਗਿਆ ਮੈਨੂੰ ਤੇ ਹਾਂਜੀ ਬਹੁਤ ਮੈਂ ਕਿਹਾ ਆ ਵੇ ਨਹੀਂ ਜੀ ਹੁਣ ਤੁਹਾਡਾ ਕੰਮ ਹੈ ਮੇਰਾ ਮੈਂ ਉਹ ਦੇ ਕੇ ਕੁਲੇ ਨੂੰ ਆਖਿਆ ਉਹ ਆਂਦਾ ਨਹੀਂ ਜੀ ਮੈਨੂੰ ਤੇ ਉਸਤਾਦ ਰਪਨ ਸਿੰਘ ਨੇ ਲਖਾਇਆ ਸੀ ਤੇ ਮੈਂ ਕਿਹਾ ਇਹ ਗੱਲ ਤੁਸੀਂ ਉੱਥੇ ਕਹਿ ਦਿੰਦੋ ਤੇ ਫਿਰ ਰਗੜਾ ਮੁੱਕ ਜਾਂਦਾ ਵੀ ਚਲੋ ਕਿਸੇ ਨੇ ਲਖਾਇਆ ਤੇ ਫਿਰ ਤੇ ਆਪਾਂ ਕਹਿ ਸਕਦੇ ਜਦੋਂ ਤੂੰ ਆਖਿਆ ਮੈਂ ਨਹੀਂ ਠਾਕ ਰਹੀ ਗੇ ਇਸ ਤਰ੍ਹਾਂ ਇਹ ਵੀ ਮਤਲਬ ਜਿਉਂ ਜਿਉਂ ਆਦਮੀ ਇਸ ਕੰਮ ਵਿੱਚ ਪੈਂਦਾ ਤੇ ਉਹ ਇਸ ਤਰ੍ਹਾਂ ਦਾ ਬਹੁਤ ਬਰੀਕੀ ਦੀ ਗੱਲ ਆ ਇੱਕ ਦਿਨ ਬਲਵੰਤ ਨਾਲ ਵੀ ਗੱਲ ਹੋਈ ਉਹ ਆਖੇ ਵੀ ਲਾਾਂ ਤੇ ਮੈਂ ਸਾਗੁਰੂ ਦੀਆਂ ਅੱਖਾਂ ਲੱਗੇ ਮੇਰੇ ਵਾਲ ਇਸ਼ਾਰਾ ਕਰਕੇ ਮੈਂ ਕਿਹਾ ਜੀ ਮੈਨੂੰ ਦੁਲਾਵਾਂ ਜਾਬਦੀ ਏ ਸ੍ਰੀ ਰਾਗ ਦਾ ਸ਼ਬਦ ਸੀ ਉਹ ਇਹ ਮੈਨੂੰ ਉਹ ਯਾਦ ਵੀ ਰਹਿ ਗਿਆ ਉਸ ਪੋਥੀ ਵੀ ਕੋਈ ਨਾ ਮੈਂ ਵੇਖਿਆ ਵੀ ਨਹੀਂ ਸੀ ਉਹ ਮੈਂ ਉਹਦੇ ਅੱਖਾਂ ਮਤਲਬ ਇਹ ਬੀਏਐਸ ਤਰ੍ਹਾਂ ਮਤਲਬ ਨਾ ਮੈਨੂੰ ਦੁਲਾਵਾਂ ਜਾਬਦੀ ਏ ਉਹਨੂੰ ਖਿਲਾਰ ਦਿੱਤਾ ਉਹਾਂ ਦਾ ਨਹੀਂ ਜੀ ਆਹ ਵੇਖੋ ਪੋਥੀ ਉਹ ਅਮਰਤ ਕੀਰਤਨ ਲਈ ਫਿਰਦਾ ਸੀ ਤੇ ਅੰਦਰ ਦੀ ਨਹੀਂ ਦੀ ਉਹਨੂੰ ਹੀ ਮਾਨ ਸੀ ਉਹਨੇ ਇੱਥੇ ਇਹ ਗੱਲ ਨਾ ਮਤਲਬ ਮੇਰਾ ਤੇ ਉਹਨਾਂ ਦਾ ਇੰਨਾ ਕੋਈ ਫਰਕ ਨਹੀਂ ਉਹਨਾਂ ਦੇ ਸ਼ਬਦ ਆਪਣੀ ਮਰਜ਼ੀ ਨਾਲ ਪੜਨਾ ਪਤਾ ਨਹੀਂ ਕਿਹੜਾ ਪੜਨਾ ਮੈਨੂੰ ਕੀ ਪਤਾ ਉਹ ਘਰੋਂ ਤਿਆਰ ਆ ਕੇ ਹੁੰਦੇ ਨੇ ਆਮ ਤੌਰ ਤੇ ਲਿਖ ਕੇ ਵੀ ਰੱਖਦੇ ਨੇ ਉਹ ਵੀ ਆਪਣੇ ਥਾ ਮਤਲਬ ਉਹਨਾਂ ਨੂੰ ਹੁੰਦਾ ਯਕੀਨ ਹੁੰਦਾ ਵੀ ਮੈਂ ਮੈਂ ਠੀਕ ਬੋਲਣਾ ਪਿਆ ਤੇ ਮੈਨੂੰ ਤੇ ਜੋ ਕੁਝ ਮਤਲਬ ਦਿਮਾਗ 'ਚ ਆਉਣਾ ਮੈਂ ਤੇ ਉਸੇ ਤਰ੍ਹਾਂ ਹੀ ਕਹਿ ਦੇਣਾ ਤੇ ਉਹ ਫਿਰ ਉਹਨਾਂ ਦਾ ਮਤਲਬ ਉਹ ਉਹ ਆੜ ਬੈਠਾ ਜੀ ਆਂਦਾ ਜੀ ਆਹ ਕੁਝ ਹੋਰ ਰਿਸ਼ਪਾਲ ਨੇ ਵੀ ਆਖਿਆ ਵੀ ਇਸ ਤਰ੍ਹਾਂ ਨਹੀਂ ਚਾਹੀਦਾ ਪੈ ਗਾਲ ਉਹਨੇ ਕਰ ਲਾ ਤੂੰ ਮਤਲਬ ਤੇ ਇਹ ਵੰਜਾ ਇਹ ਉਹਨੇ ਤੇ ਜਿਆਦਾ ਸ਼ਬਦ ਉਹਨੂੰ ਕਿਹਾ ਉਹਨੇ ਆਖਿਆ ਵੀ ਉਹ ਬਲਜੀਤ ਸੀ ਉਹ ਵੀ ਇਸੇ ਤਰ੍ਹਾਂ ਅਰਦਾਸਦਾ ਸੀ ਉਹ ਪੋਥੀ ਕੋਲ ਪਈ ਸੀ ਰੱਬੋ ਮੇਰੇ ਵੀ ਦਿਮਾਗੇ ਚ ਫਿਰ ਮੈਂ ਉਹ ਪੋਥੀ ਵੇਖੀ ਨਾ ਫਿਰ ਮੈਨੂੰ ਵੀ ਥੋੜਾ ਜਿਆਦਾ ਹੰਚਾਈਦਾ ਤੇ ਲੀਤਾ ਆ ਗਿਆ ਮੈਂ ਉਹਦੇ ਅੱਗੇ ਜਾ ਕੇ ਨਾ ਸਟੇਜ ਤੇ ਅੱਗੇ ਜਾ ਕੇ ਦੀ ਮੈਂ ਆ ਆ ਵੇਖ ਲਵਾਂਗੇ ਉਹ ਆਂਦਾ ਮੇਰੇ ਕੋਲ ਮੈਂ ਕਿਹਾ ਪ੍ਰਮਾਣਿਕ ਜਿਹੜੀ ਉਹਨੂੰ ਤੇ ਅਸੀਂ ਗੁਰੰਤ ਸਾਹਿਬ ਨੂੰ ਮੰਨਾਂਗੇ ਜਿਹੜੀਆਂ ਪੋਥੀਆਂ ਨੇ ਅਮਰਤ ਕੀਰਤ ਨੇ ਉਹ ਤੇ ਉਹਨਾਂ ਨੇ ਗਲਤ ਵੀ ਕਈ ਵਾਰੀ ਹੋ ਕਈ ਵਾਰੀ ਹੋ ਜਾਂਦਾ ਉਹ ਇਸ ਤਰ੍ਹਾਂ ਕਰਕੇ ਨਾ ਮਤਲਬ ਜਿਉਂ ਜਿਉਂ ਆਦਮੀ ਇਸ ਕੰਮੇ ਸਤਿਗੁਰੂ ਕਿਰਪਾ ਕਰਨ ਤੇ ਹੁੰਦਾ ਇੱਦਾਂ ਹੈ ਕਿ ਮਾਸਟਰ ਜੀ ਇੱਕ ਨਾ ਆਪਣੇ ਹੁਣ ਤੋਂ ਕੰਪਿਊਟਰ ਆ ਗਈਆਂ ਆਪਣੀਆਂ ਜਿੰਨੀ ਵੀ ਬਾਣੀ ਹੈਗੀ ਹੈ ਸਰਦ ਸਾਹਿਬ ਦੀ ਸਾਰੇ ਕੰਪਿਊਟਰ ਚ ਆ ਗਈ ਆ ਹਾਂਜੀ ਉਹਦੇ ਕੋਈ ਸਹੂਲਤ ਨਹੀਂ ਇੱਥੇ ਹੈਗੀ ਭਾਈ ਕਹਿੰਦੇ ਚਾਹੀਦਾ ਆ ਫਿਰ ਉਹ ਫਿਰ ਆਪਣੀ ਤੇ ਜੇ ਉਸ ਤਰੀਕੇ ਦਾ ਮੈਂ ਤੁਹਾਨੂੰ ਜੇ ਸੀਡੀ ਦੇ ਜਵਾਂ ਤੇ ਤੁਸੀਂ ਇਥੇ ਕੰਪਿਊਟਰ ਤੇ ਕਿਤੇ ਲਾ ਕਰ ਸਕਦੇ ਕਿ ਕਿਸ ਤਰ੍ਹਾਂ ਵੀ ਉਹ ਮੈਂ ਸੀਡੀ ਤੁਹਾਨੂੰ ਆ ਅੱਛਾ ਉਹ ਕੀਤਾ ਮੈਂ ਨਹੀਂ ਕੀਤਾ ਮੈਨੂੰ ਆਪਣੇ ਅਕਾਲੀਆਂ ਨੇ ਕੀਤਾ ਹੋਇਆ ਉਹ ਤੇ ਉਹ ਪਰ ਜਾ ਤੋ ਠੀਕ ਹੀ ਆ ਉਹ ਤਾਂ ਵੈਸੇ ਇਨਾ 100% ਤੇ ਸਾਡਾ ਅੰਤਰ ਹੈ ਉਹਨਾਂ ਦਾ ਨਾ ਜਿਹੜਾ ਉਹ ਇਹ ਜਿਵੇਂ ਕੱਲ ਹੀ ਪੜਿਆ ਸੀ ਕੱਲ ਖਰੇ ਪੜੀ ਸੀ ਉਹ ਜਿਹੜਾ ਆਪਣਾ ਸੀ ਇਕਬਾਲ ਸਿੰਘ ਨੇ ਦੁਵਾਨ ਲਾਇਆ ਅੱਛਾ ਅਰਥ ਤੇ ਉਹਨੇ ਠੀਕ ਕੀਤਾ 베ਣੀ ਕਹਿ ਸੁਨੋਰੇ ਇਹਦੇ ਵੀ ਹੁਣ ਸਤਿਗੁਰੂ ਪ੍ਰਤਾਪ ਸਿੰਘ ਨੇ 베ਣੀ ਕਹਿ ਸੁਨੋਰੇ ਸੰਤੋ ਆਕਿਆ ਜਦੋਂ ਪਾਠ ਜਿਹੜਾ ਨਾ ਉਹ ਭਗਤ ਹੋਏ 베ਣੀ ਕਹਿ ਸੁਨੋਰੇ ਭਗਤੋ ਤੇ ਉਹ ਕਰਦੇ ਨੇ ਤੁਸੀਂ ਆਦਗਰਨ ਤੇ ਵੇਖੋਗੇ ਉਹ ਤੁਹਾਡੇ ਕੋਲ ਤੁਸੀਂ ਵੇਖਿਆ ਜੇ ਉਹਦੇ ਤੇ ਉਹਦੇ ਤੇ ਮਰਨ ਮੁਕਤ ਕਿਨ ਪਾਈ ਉਹਨਾਂ ਨੇ ਪਾਠ ਕੀਤਾ ਹੋਣਾ ਆਮ ਤੌਰ ਤੇ ਮਤਲਬ ਤਾਂ ਸਾਡਾ ਸਤਿਗੁਰੂ ਪ੍ਰਤਾਪ ਸਿੰਘ ਦਾ ਹੁਕਮ ਜਿਹੜਾ ਨਾ ਮਰਨ ਨਾ ਮੁਕਤ ਕਿਨ ਪਾਈ ਮਰਿਆਂ ਤੋਂ ਬਾਅਦ ਮੁਕਤ ਨਹੀਂ ਕਿਸੇ ਨੇ ਪਾਈ ਜਿਉਂਦੇ ਪਾਈ ਇਸ ਤਰ੍ਹਾਂ ਦੇ ਜਿਹੜੇ ਨਾ ਉਹ ਉਹਨਾਂ ਦਾ ਫਰਕ ਜਰੂਰ ਇਹਨਾਂ ਕੋ ਮਤਲਬ ਉਹਦੇ ਨਾਲ ਅਰਥ ਦਾ ਫਿਰ ਵਰਕ ਪਵੇਗਾ ਤੇ ਉਹ ਤੁਹਾਡੇ ਵਾਲੀ ਜਿਹੜੀ ਚੀਜ਼ ਬਣੀ ਚੀਜ਼ ਹੈ ਨਾ ਵਧੀਆ ਕਿਧਰੇ ਕਿਧਰੇ ਸਾਡਾ ਉਹਨਾਂ ਦਾ ਅੰਤਰ ਹੋਵੇਗਾ ਥੋੜਾ ਬਾਧਾ ਉਹ ਇਸ ਤਰ੍ਹਾਂ ਕੀਤਾ ਸੌਖਾ ਜੀ ਵੀ ਇੱਕ ਸੀੜੀ ਨਾ ਤੁਸੀਂ ਕੰਪਿਊਟਰ 'ਤੇ ਪਾਓ ਹਾਂਜੀ ਜਿਹੜੀ ਤੁਹਾਨੂੰ ਜਿਸ ਤਰ੍ਹਾਂ ਕੋਈ ਸ਼ਬਦ ਹਾਂਜੀ ਉਹ ਤੁਸੀਂ ਲੱਭਣਾ ਚਾਹੁੰਦੇ ਹੋ ਇੱਕ ਅੱਖਰ ਵੀ ਆਉਦਾ ਨਾ ਤੁਹਾਨੂੰ ਯਾਦ ਠੀਕ ਉਹ ਤੁਸੀਂ ਅੱਖਰ ਵਿੱਚ ਪਾ ਦਿਓ ਹਾਂਜੀ ਅੱਛਾ ਉਹ ਅੱਖਰ ਦੇ ਸਾਰੇ ਅੱਖਰ ਦਾ ਇੱਕ ਅੱਖਰ ਤੋਂ ਇੱਕ ਅੱਖਰ ਕੋਈ ਨਾ ਉਹ ਪਾ ਦਿਓ ਨਾ ਜਿੰਨੇ ਵੀ ਅੱਖਰ ਉਹ ਨਾ ਸਾਰੇ ਸਾਰੇ ਹਜ਼ਾਰਾਂ ਗੁਰ ਲੱਭਦੇ ਨੇ ਟਰਾਈ ਕਰੋ ਜਿਹੜਾ ਨਾ ਵਿਸ਼ੇਸ਼ ਹੋਵੇ ਤੇ ਉਹ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਉਹਦਾ ਵੀ ਤੁਹਾਡੇ ਵਾਲੀ ਗੱਲ ਇਸੇ ਤਰ੍ਹਾਂ ਵੀ ਗੁਰ ਸ਼ਬਦ ਦੇ ਤੇ ਉਹਨਾਂ ਨੇ ਉਹ ਮਤਲਬ ਗੁਰ ਵਾਲੇ ਸ਼ਬਦਾਂ ਵਾਲੇ ਨਾ ਸਾਰੀਆਂ ਪੰਕਤੀਆਂ ਦਿੱਤੀਆਂ ਹੋਣਗੀਆਂ ਉਹਦੇ ਨਾਲ ਗੁਰ ਲਿਖ ਕੇ ਨਾ ਅੱਗੇ ਉਹਦਾ ਪੰਨਾ ਲਿਖਿਆ ਹੋਵੇਗਾ ਉਥੋਂ ਫਿਰ ਇਹ ਵੀ ਉਹ ਮੁਸ਼ਕਲ ਤੇ ਹੋ ਜਾਂਦੀ ਵੀ ਗੁਰ ਤੇ ਹੁਣ ਕਈ ਵਾਰੀ ਆਉਂਦਾ ਤੇ ਹਾਂ ਜਿਹੜੇ 2 4 ਨੇ ਉਹਨਾਂ ਦਾ ਲੱਭ ਸਕਦੇ ਉਹਨਾਂ ਦਾ ਨਾ ਕੋਸ਼ਿਸ਼ ਇਹੀ ਕਰੀ ਦੀ ਅ ਵੀ ਉਹ ਜਲਦੀ ਜਲਦੀ ਅਗਲੀ ਵਾਰ ਕਿਸੇ ਤਰੀਕੇ ਨਾਲ ਮੈਂ ਪਹੁੰਚਾ ਚਲੋ ਕੋਈ ਤੇ ਇਥੇ ਕੰਪਿਊਟਰ ਤੇ ਆਪਣੇ ਬੱਚੇ ਵਗੈਰਾ ਵੀ ਕਾਫੀ ਉਹਦੇ ਨਾਲ ਸਹਾਤਾ ਤੇ ਬੜੀ ਮਿਲਦੀ ਹੈ ਪਰ ਮੇਰਾ ਤੇ ਥੋੜਾ ਜਿਹਾ ਕੰਮ ਹੈ ਵੇ ਨਾ ਵੀ ਉਹ ਸਿਰਦਰਦੀ ਵਾਲੀ ਗੱਲ ਹੈ ਵੀ ਜੇ ਹੁਣ ਤੁਸੀਂ ਹੁਣ ਉਹ ਟਰਾਈ ਕਰੋਗੇ ਤੇ ਉਹ ਫਿਰ ਉਹਦੇ ਨਾਲ ਮੈਨੂੰ ਮੈਂ ਮਤਲਬ 8ਵੀਂ ਤੱਕ ਮੈਥ ਪੜ੍ਹਾਉਂਦਾ ਰਿਹਾ ਤੇ ਉਹ ਇਸ ਤਰ੍ਹਾਂ ਦਾ ਕੰਮ ਚੱਲਿਆ ਸੀ ਮਤਲਬ ਜਵਾਨੀ ਹੀ ਕਰ ਦੇਣਾ ਅਗਲੇ ਨੂੰ ਸਮਝਾ ਵੀ ਦੇਣਾ ਮਤਲਬ ਇਹ ਨਹੀਂ ਵੀ 5 ਨੂੰ 5 ਨਾਲ ਗੁਣਾ ਕਰਕੇ ਦੱਸੋ ਉਹ ਜਦੋਂ ਉੱਥੇ ਕਾਲਜ ਬਣਿਆ ਨਾ ਮੈਨੂੰ ਯਾਦ ਹੈ ਉੱਥੇ ਡੱਬ ਵਾਲੀ ਗੱਲ ਮਨੇ ਮਨ ਨਾਲ ਗੱਲਿਆ ਉਹ ਹੁਣ ਉਹ ਦੂਜਾ ਕਰੇ ਉਹਦਾ ਕੈਲਕੂਲੇਟਰ ਨਾਲ ਕਰੇ ਮੈਂ ਕਿੱਥੇ ਯਾਬਦਾ ਫਿਰ ਨਾ ਉਹ ਸਾਲੀ ਕੀਤਾ ਦਸਮ ਗ੍ਰੰਥ ਉਹ ਚੀਜ਼ ਉਹ ਹਲੇ ਬਣੀ ਪਰੀ ਗਈ ਭਾਈ ਦੀਆਂ ਵਾਰਾਂ ਜਿਹੜੀਆਂ ਉਹ ਵੀ ਨਹੀਂ ਹਲੇ ਬਣੀ ਠੀਕ ਹੈ ਠੀਕ ਹੈ ਤੇ ਉਹ ਫਿਰ ਮੁਸ਼ਕਲ ਜੀ ਹੋ ਜਾਂਦੀ ਸਿਰਫ ਨਾ ਨੇ ਗਾਂ ਚਲੋ ਜੋਰ ਜਾ ਹੋਣਾ ਤਾਂ ਉਹ ਪਹਿਲੋਂ ਇੱਕ ਵਾਰੀ ਫਿਰ ਜਰਮਨ ਦਾ ਬੰਦਾ ਸੀ ਕੋਈ ਇਹਨਾਂ ਨੂੰ ਮਿਲਿਆ ਸੀ ਹਰਪਾਲ ਸਿੰਘ ਉਹ ਆਂਦਾ ਸੀ ਵੀ ਉੱਥੇ ਭੇਜੋ ਇਹਨੂੰ ਤੇ ਉੱਥੇ ਰਿਕਾਰਡਿੰਗ ਸਾਰੀ ਕਰ ਲਈ ਉਹ ਫਿਰ ਉਸ ਤੋਂ ਬਾਦ ਨਾਂ ਮੇਰਾ ਹੀ ਕੋ ਬਣਿਆ